ਮੇਰਾ ਦਿਲ ਲੌਣਾ ਮੈਨੂੰ ਬੜਾ ਔਖਾ ਲੱਗਦਾ ਸੀ ਤੇ ਜ਼ਿੰਦਗੀ ਜੀਉਣਾ ਮੈਨੂੰ ਔਖਾ ਲੱਗਦਾ ਸੀ ਕਦੇ ਅੰਦਰੋਂ ਹੀ ਅੰਦਰੋਂ ਦਰਦੀ ਸੀ ਮੈਂ ਨਾ ਦੱਸਦੀ ਸੀ ਮੈਂ ਜਿੰਗੀ ਦੇ ਪੰਨੇ ਤਾਂ ਖਰਾਬ ਹੋ ਗਏ ਇੱਕ ਦੋ ਰਿਸ਼ਤੇ ਖਰਾਬ ਹੋ ਗਏ ਜਿੰਗੀ ਦੇ ਪੰਨੇ ਤਾਂ ਖਰਾਬ ਹੋ ਗਏ ਇੱਕ ਦੋ ਰਿਸ਼ਤੇ ਖਰਾਬ ਹੋ ਗਏ ਤੂੰ ਮਿਲਿਆ ਤੇ ਜ਼ਿੰਦਗੀ ਜੀਉਣਾ ਸਿੱਖ ਗਈ ਮੈਂ ਘਰਾਂ ਸੁਖ ਉਸ ਸੱਚੇ ਰੱਬ ਦਾ ਤੇਰੇ ਉੱਤੇ ਰੋਬ ਨਹੀਂ ਮੈ ਲਾਉਣਾ ਸਿੱਖ ਗਈ ਤੂੰ ਕਰੀ ਜਾਵੇ ਗੱਲਾਂ ਮੇਰੇ ਨਾਲ ਹਾਨਿਆਂ ਤੂੰ ਪੁੱਛੀ ਜਾਵੇ ਮੇਰੇ ਦੇ ਨਿਹਾਲ ਹਾਨਿਆਂ ਮੈਂ ਬੱਚਿਆਂ ਦੇ ਵਾਂਗੂ ਕਰਦੀ ਤੂੰ ਕਰੀ ਜਾਵੇ ਪੂਰੀ ਹਰ ਰੀਝਹਾਨਿਆਂ ਹੋਰ ਕੀ ਦੱਸਾਂ ਐ ਸਭ ਹੀ ਲੱਗੇ ਤੇਰਾ ਆਉਣਾ ਜ਼ਿੰਦਗੀ 'ਚ ਹੀ ਲੱਗੇ ਮੈਂ ਕਿਹਾ ਕੇ ਨਹੀਂ ਤੂੰ ਸੋਚਿਆ ਵੀ ਨਹੀਂ ਕਿੰਨਾ ਕਰਦਾ ਪਿਆਰ ਕਦੇ ਦੱਸਿਆ ਵੀ ਨਹੀਂ ਜਦੋਂ ਦੇਖਾਂ ਤੈਨੂੰ ਤੂੰ ਹੋਰ ਸੋਹਣਾ ਲੱਗੇ ਜਿਵੇਂ ਸੂਰਜ ਦਾ ਕੋਰਾ ਸੋਹਣਾ ਲੱਗੇ ਮੈਂ ਕਰਾ ਕੀ ਯਾਰ ਵੇ ਤੈਨੂੰ ਦੇਖ-ਦੇਖ ਜੱਗ ਹੋਰ ਸੋਹਣਾ ਲੱਗੇ ਕਿ ਤੇਰੇ ਨਾਲ ਹੱਸਾ ਖੇੜਾ ਤੇਰਾ ਬਣ ਕੇ ਹੋਜੇ ਜੇ ਨਾਰਾਜ ਮੈਂ ਬਣਾਵਾ ਸੋਣੀਏ ਔਰਾ ਵਾਂਗੂ ਛੱਡ ਕੇ ਨਾ ਸੋਣੀਏ ਮੈਂ ਚੜਾਈ ਬਖਤ ਰੱਬ ਕੋਲ ਚੰਨ ਵੱਲ ਵੇਖੀ ਜਾਵਾ ਰੋਜ ਰਾਤ ਨੂੰ ਮੇਰਾ ਦਿਲ ਲੌਣਾ ਮੈਨੂੰ ਬੜਾ ਔਖਾ ਲੱਗਦਾ ਸੀ ਤੇ ਜ਼ਿੰਦਗੀ ਜੀਉਣਾ ਮੈਨੂੰ ਔਖਾ ਲੱਗਦਾ ਸੀ ਕਦੇ ਅੰਦਰੋਂ ਹੀ ਅੰਦਰੋਂ ਦਰਦੀ ਸੀ ਮੈਂ ਦੁੱਖ ਚੁਲਾਹੀ ਹੰਬਿਆ ਨਾ ਦੱਸਦੀ